ਲੋਕ ਜੋ ਜੋ ਫੁੱਲੇ ਘਣੋਂ ਕਾਚੀ ਦੇ ਵਿਕਾਰ ਸੰਸਾਰ ਕੀ ਇਹ ਜੋਰ ਤੇ ਜੁਲਮਾ ਫੜਦਾ ਬੰਦਾ ਸਾਨੂੰ ਵੀ ਨਾ ਜੋਰਰ ਜੋਲ ਨਾ ਵਾਦਾ ਹੁੰਦਾ ਸੰਸਾਰ ਤਾਂ ਕਿ ਬਿਜੋਰ ਦੇ ਲੋਕ ਲੱਗੇ ਜੁਲਮ ਵੀ ਵਾਦਾ ਤਕਾਵੀ ਵਾਦਾ ਕਾਚੀ ਦੇ ਵਿਕਾਰ ਪਰ ਕਾਚੀ ਦੇ ਬੇਕਾਰ ਬੇਕਾਰ ਜੀ ਜਵਸਤੇ ਆਕਾਰ ਕਰ ਰਹੇ ਹੈ ਜੋ ਜੋ ਕਾਰ ਉਹ ਹੋ ਜੋ ਕਾਰ ਕਰ ਰਿਹਾ ਜੋ ਜ਼ਰੂਰੀ ਬੇਕਾਰ ਦੇ ਵਾਸਤੇ ਕਰੇ ਜੋ ਚੀਜ਼ ਬੇਕਾਰ ਹੈ ਉਹਦੇ ਵਾਸਤੇ ਸਾਰੀ ਕਾਰ ਕਰੇ ਕਾਰ ਕਰੇ ਵਾਸਤੇ ਕਰੇ ਜੋ ਚੀਜ਼ ਬੇਕਾਰ ਹੈ ਸਾਰੀ ਕਾਰ ਉਹ ਬੇਕਾਰ ਹੋ ਜਾਣੀ ਹੈ ਆਹਾਂ ਉਹ ਬੰਦਨ ਪੜੇ ਨਾਨਕ ਨਾਮ ਛਤਾ ਆਹੋਤ ਕਰਕੇ ਜਿਹੜੀ ਹੰਕਾਰੀ ਬੁਢੀ ਹੈ ਬੰਨਣਾ ਹੀ ਕੋਣ ਵਾਲੀ ਹੁੰਦੀ ਹੈ ਬੰਨਣਾ ਹੀ ਬੰਦਾ ਰਹਿੰਦਾ ਨਾਨਕ ਕਹਿੰਦਾ ਹੈ ਛੁਟਕਾਰਾ ਹੋਣਾ ਨਾਮ ਨਾਨਕ ਨਾਮ ਛੁਟਕਾਰਾ ਛੁਟਕਾਰਾ ਜੋ ਹੁਣ ਨਾਮ ਉਹ ਹੁਣੇ ਖੋਪੂ ਲਾ ਖੋਪਮ ਨਾਲ ਛੁਟਕਾਰਾ ਹੋਣਾ ਜਿਹੜਾ ਜੋਰ ਜਲ ਕਰਦਾ ਆਪਣੇ ਹੁਕਮ ਨਾ ਕਰਦਾ ਮੇਰਾ ਹੁਕਮ ਚੱਲਦਾ ਜੋਰ ਜਲ ਤਾਂ ਆਪਣੇ ਹੁਕਮ ਹੀ ਚੱਲਦਾ ਆਪਣਾ ਹੁਕਮ ਚਲਾਉਂਦਾ ਪਰਮੇਸ਼ਰ ਦਾ ਹੁਕਮ ਤੋਂ ਖਿਲਾਫ ਜਿਹੜਾ ਆਪਣਾ ਹੁਕਮ ਚਲਾਉਂਦਾ ਜੋ ਜੁਲਮ ਹੈ ਪਰ ਮੈਸ਼ਾ ਦੇ ਬਾਣੇ ਦਾ ਝਟਕਾਰਾ ਹੋਣਾ ਤੇਰਾ ਝਟਕਾਰਾ ਤਾਂ ਫਿਰ ਹੋਣਾ ਨਹੀਂ ਜਿਹਨਾਂ ਦੇ ਤੂੰ ਹੁਕਮ ਚਲਾਉਣਾ ਉਹਨਾਂ ਦਾ ਝਟਕਾਰਾ ਤਾਂ ਭਾਵੇਂ ਹੋ ਜਵੇ ਤੇਰਾ ਯੋਗ ਨਹੀਂ ਹੋਣਾ ਕੰਸਨਟ ਐਸ ਗੀਤਾ ਹੋਇਆ ਪ੍ਰਸ਼ਨ ਨਹੀਂ ਪ੍ਰਸ਼ਨ ਤੇ ਬਾਤ ਨੂੰ ਉਹਨਾਂ ਦਾ ਝਟਕਾਰਾ ਤਾਂ ਭਾਵੇਂ ਹੋ ਜਵੇ ਜਿਹੜੇ ਨਾਮ ਜਪਦੇ ਹੋ ਕੰਦ ਦਾ ਰੋਣਾ ਝੰਕਾ ਰੱਖ ਮੇਰਾ ਜਿਹੜਾ ਲੋਕਾਂ ਨੂੰ ਆਪਣੇ ਕਾਬੂ ਚ ਰੱਖਦਾ ਉਹਦਾ ਝੰਕਾ ਨਹੀਂ ਆਉਣਾ ਜਿਹੜੇ ਕਾਬੂ ਚ ਨੇ ਹੋ ਸਕਦਾ ਉਹਦਾ ਨਾਮ ਜਪਦਰ ਨੇ ਨਾ ਸਹਜਾ ਤੇ ਜਿਹੜੇ ਨੇ ਨੌਵੇਂ ਪਾਉ ਜਾਂ ਉਸੇ ਪਿੰਜਰੇ ਚ ਨੇ ਕਿ ਆ ਚ ਨੇ ਉਹਨਾਂ ਸੋਨੇ ਛੱਟੇ ਆਣੇ ਜਿਹਦੇ ਕਬਜੇ ਜਨੇ ਉਹ ਉਹ ਛੱਟੇ ਨਹੀਂ ਆਣੇ ਉਹ ਬੰਦਾ ਜੁੜਿਆ ਹੋਇਆ ਨੇ ਉਹ ਆਪਣਾ ਹੱਕੂ ਚੜ੍ਹਨ ਜਾਉਣਾ ਇਸ ਕਰਕੇ ਕੱਚੀ ਦੇ ਵਾਸਤੇ ਕਰ ਰਿਹਾ ਹੈ